ਹਰੇ ਸੱਚਾ ਮਾਨ ਦੂਈ ਗਣਤ ਲਾਹੇ ਆਪਣੀ ਨਜ਼ਰ ਨਿਹਾਲ ਆਪੇ ਲੈਓ ਲਾਹੇ ਜੋ ਕੁਝ ਕਰ ਰਿਹਾ ਪਰਮੇਸ਼ਰ ਚੰਗਾ ਹੀ ਮਨਈ ਕੁਝ ਗਲਤ ਨਹੀਂ ਕਰ ਰਿਹਾ ਦੂਈ ਗੰਤ ਲਾਹੇ ਜੇ ਦੂਜੀ ਗਲਤੀ ਹੈ ਨਾ ਤੇਰੇ ਅੰਦਰ ਵੀ ਆ ਚੱਲਿਆ ਬੜਾ ਇਹਨੂੰ ਖੇੜ ਦੇ ਜੋ ਕੁਝ ਕਰਦਾ ਸਭ ਚੰਗੇ ਬੇਚੰਗੇ ਸਭ ਆਪਣੀ ਨਜ਼ਰ ਨਿਹਾਲ ਆਪੇ ਲੈਓ ਲਾਹੇ ਤੋ ਇਹ ਮੰਨ ਕੇ ਚੱਲਣਾ ਸਭ ਕੁਝ ਚੰਗਾ ਹੈ ਤੇ ਤੇ ਸਮਝ ਲਓ ਕਿਰਪਾ ਹੋ ਜੂਗੀ। ਨਿਹਾਲ ਕਰ ਦੂਗੀ ਨਿਹਾਲ ਕਰਨ ਵਾਲੀ ਉਹਦੀ ਤੇ ਹੋ ਜੂਗੀ। ਆਪਲੇ ਹੋ ਲਾਏ ਉਹ ਆਪਣੇ ਨਾਲ ਜੋੜ ਲੂਗਾ ਤੈਨੂੰ। ਹੋ ਜੂਗੀ ਪ੍ਰਿਆਨ ਜੋੜ ਲੂਗਾ ਨਿਹਾਲ ਹੋ ਜਾਣਾ। ਜਨ ਦੇਹ ਮੱਤੀ ਉਪਦੇਸ਼ ਵਿੱਚੋਂ ਭਰਮ ਜਾਏ। ਜੋ ਤੁਰ ਲਿਖਿਆ ਲੇਖ ਸੋਈ ਸਭ ਕਮਾਈ ਆਪਣੇ ਜਲਾ ਨੂੰ ਆਪ ਅੰਦਰ ਵਸਦਤ ਹੋ ਜੀ ਉਪਦੇਸ਼ ਉਪਦੇਸ਼ ਜਿਹੜਾ ਦਿੰਦਾ ਉਹ ਮੱਤੇ ਹੁੰਦੀ ਹੈ ਵਿੱਚੋਂ ਭਰਮ ਜਾਏ ਜਿਹੜਾ ਭਰਮ ਹੈ ਨਾ ਚੰਗਾ ਮਾੜਾ ਇਹ ਦੂਰ ਹੋ ਜਾ ਸਭ ਚੰਗਾ ਇਹ ਆ ਜਿਹੜਾ ਮਾੜਾ ਲੱਗਦਾ ਉਹ ਵੀ ਚੰਗਾ ਹੀ ਹੈ ਸਾਡੇ ਸਮਝਣ ਦੇ ਫਰਕ ਦਾ ਸਾਨੂੰ ਭਰਮ जो, जो हो तो री लिखया लेख बस कोई सब कमाए ओमे करवे पाने ते चलणा सब किस तिस ना जाए नानक सुख आनंद भए प्रभु की मन रजाए सब किछ वस, ना ही जाए, जाए। सब कुछ हुकुम दे वस् ਪਰਮਾਤਮਾ ਦੇ ਸਭ ਕੁਝ ਵਾਸਰੇ ਚਾਹ ਕੋਈ ਉਹ ਤੇ ਆਕੀ ਦੀ ਦੂਜੀ ਨਾ ਹੀ ਜਾਏ ਹੋਰ ਕੋਈ ਜਗ੍ਹਾ ਨਹੀਂ ਜਿਹਦੇ ਵਾਸਤੇ ਦੂਜਾ ਕੋਈ ਉਹਦਾ ਸ਼ਰੀਰ ਰਹੀਂ ਹੈ ਜਿਹਦੇ ਵਾਸਤੇ ਵਿੱਚ ਕੁਝ ਹੋਵੇ ਸੰਸਾਰ 'ਚ ਕਹਿੰਦੇ ਨੇ ਲੋਕ ब्रह्मा विष्णु ਸ਼ਿਵ ਜੀ ਆ ਹੋਰ ਕੋਈ ਨਹੀਂ ਆ ਹੋਰ ਪਰਮਾਤਮਾ ਦੇ ਬਾਣੀ ਚ ਸਭ ਕੁਝ ਨਾਨਕ ਸੁਖ ਅਨੰਦ ਪਾਏ ਪ੍ਰਭ ਦੀ ਮਨਾ ਹਿਦਾਰੇ ਜਿਹੜਾ ਨੇ ਪ੍ਰਭ ਦੀ ਰਜ਼ਾ ਮੰਨ ਲੈਣੀ ਹੈ ਜਾ ਕੋਈ ਪ੍ਰਸਰਬੀ ਰਜ਼ਾ ਮੰਨ ਲੈਂਦਾ ਉਹ ਸੁਖ ਆਨੰਦ ਉਹਨੂੰ ਹੋ ਜਾਂਦਾ ਸੁਖ ਆਨੰਦ ਉਹਨਾਂ ਨੂੰ ਹੀ ਹੁੰਦਾ ਹੈ ਕਿ ਪ੍ਰਗਤੀ ਦੇ ਜਹਾ ਦੇ ਵਿੱਚ ਰਜ਼ਾ ਨੂੰ ਮੰਨ ਲੈਂਦੇ ਨੇ ਉਹਦੇ ਭਾਂਡੇ ਨੂੰ ਗੋਲਨ ਤੇ ਠੀਕ ਹੈ ਜੀ ਇੱਥੇ 7ਵੇਂ ਸ਼ਲੋਕ ਦੀ ਸਮਾਪਤੀ ਹੈ ਜੀ